ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਭਾਉ ਉਸ ਨੂੰ ਸੁਖ ਨ ਉਪਜੈ ਭਾਵੇਂ ਸੋ ਗੇੜਾ ਆਵੋ ਜਾਓ ਆ ਜੇ ਸੁਖ ਕੋ ਚਾਹੇ ਸਦਾ ਅਤਾਸੀ ਵੀ ਸਾਰੇ ਸੁਖ ਚਾਹਦੇ ਨੇ ਛੜ ਨਾਮ ਕੀ ਲੈ ਪ੍ਰਭ ਦੀ ਛਾਉ ਲੈ ਇਕਲੇ ਇੱਕ ਪੰਕਤੀ ਸਤਿਗੁਰ ਕੀ ਆਈਆਂ ਇਸ ਗੱਲ ਦੀ ਪ੍ਰਤੀਤ ਹੀ ਨਾ ਆਈ ਜੇ ਸੁਖ ਕੋ ਚਾਹੇ ਸਦਾ ਛੜ ਨਾਮ ਕੀ ਲੈ ਤੇ ਭਰੋਸਾ ਨਹੀਂ ਕੀਤਾ ਪਰ ਇਹ ਸ਼ਬਦ ਨਾਲ ਉਹਦਾ ਪਉ ਪ੍ਰੇਮ ਦੀ ਲੱਗਿਆ ਕਿ ਹਾਂ ਮੈਂ ਕਰਦਾ ਇਹ ਕਹਾਵਤਾਂ ਨੇ ਵਿਸ਼ਵਾਸ ਨਹੀਂ ਕੀਤਾ ਉਹਨੂੰ ਸੁਖ ਨਹੀਂ ਹੋ ਸਕਦਾ ਉਹਨੂੰ ਜੋ ਗੱਲੋਂ ਪਿਆ ਉਹਦਾ ਪੈਦਾ ਹੋਵੇ ਜਿਵੇਂ ਪਾਵੇ 100 ਗੜਾ ਆਉ ਹੋ ਜਾਓ ਉਹ 100 ਗੜਾ ਆਉ ਜਾ ਮਤਲਬ ਇਹ ਦੀ ਹੈਗਾ ਇੱਥੇ ਬਈ ਉਹ ਹੋਰ ਜੂਠ ਵਿੱਚ ਫਿਰੇ ਹਾਂ ਉਹ ਕਹਿੰਦੇ ਆਦਮੀ ਵੀ ਜੂਠੇ ਰਹੇ ਔਰ ਸਿੱਖਾ ਦੇ ਘਰੇ ਪੈਦਾ ਹੋਵੇ ਜਹੇ 100 ਵਾਰ ਇਹ ਗੱਲ ਸੁਣ ਲਵੇ 100 ਚੰਗੂ ਜਿੰਨਾ ਜਰੂਰ ਉਹ ਕੋ ਇਹ ਗੱਲ ਦੀ ਪ੍ਰਤੀਤ ਨਹੀਂ ਆਉਂਦੀ ਸਤ ਕੋ ਗੁਰਬਾਣੀ ਨੂੰ ਸੱਤ-ਸੱਤ ਕਰਕੇ ਮੰਨਦਾ ਨਹੀਂ ਗੁਰਬਾਣੀ ਦੇ ਉਪਦੇਸ਼ ਦੇ ਉਹਦਾ ਪ੍ਰੇਮ ਨਹੀਂ ਹੁੰਦਾ ਉਸ ਤੋਂ ਸਿੱਖਾਂ ਨੇ ਸੁਣ ਲਈ ਬਸ ਬਕਾਲਾ ਉੱਥੇ ਹੀ ਹੈ ਗੁਰੂ ਦਾ ਕਹਿਣਾ ਸਰਮਕੇ ਉੱਥੇ ਨਾਨਕ ਗੁਰਮੁਖੀ ਸਹਿਜ ਮਿਲੈ ਸੱਚੇ ਸਿਉ ਲਿਵ ਲਾਉ ਨਾਨਕ ਜੀ ਨੇ ਗੁਰਮੁਖ ਹੈ ਨਾ ਗੁਰਮੁਖ ਗੁਰਮੁਖ ਕਾਹ ਹੁੰਦਾ ਕੋਈ ਬੋਹ ਹੈ ਜਿਹਦੀ ਆਣੀ ਅਰਛਾ ਬਦਨਾ ਭੌ ਲੱਗਿਆ ਉਹ ਗੁਰਮੁਖ ਹੈ ਉਤਲੇ ਪਗਤੀ ਉਤਲੇ ਤਾਂ ਦਿਨੋਂ ਜਿਹਨੂੰ ਭਰਤੀ ਤਾਂ ਸਤਿਗੁਰ ਤੇ ਸਭ ਜੋ ਕੇ ਹੈ ਔਰ ਉਹਦੇ ਉਪਦੇਸ਼ ਨਾਲ ਉਹਦਾ ਪੰਗੋ ਹੋ ਗਿਆ ਗੱਲ ਨਾਲ ਸੱਤ ਸੱਤ ਕਰਕੇ ਮੰਨ ਲਈ ਉਹ ਗੁਰੂ ਗ੍ਰੰਥ ਉਹਦੇ ਅੰਦਰ ਸਹਿਜ ਪੈਦਾ ਹੁੰਦਾ ਹੈ ਉਹਦੇ ਅੰਦਰ ਉਹਦਾ ਵਾਸ ਟਿਕਦਾ ਉਹਦੀ ਭਟਕਣਾ ਖੁੱਦੀ ਹੈ ਸੱਚੇ ਸੌਂਦੇ ਬਲਾਈ ਉਹ ਸੱਚਾ ਗਵਾਂ ਦੇ ਸੱਚਾ ਗਵਾਂ ਬਾਂਹ ਟੂਠਾ ਹਾਂਜੀ ਬਾਂਹ ਟੂਠਾ ਕੰਮ ਜੋ ਹੋਇਆ ਅੰਤਰਾ ਅਦਵਾ ਸੱਚੀ ਹੈ ਜੋ અપਪਰਾਧਮਨ ਆਰਾਧ ਤੋ ਜਿਸਕੇ ਆਪਾਂ ਬੋਧਿਆਨ ਕੁਰਬਾਨੀ ਚ ਦੇ ਨਾਲ ਜੁੜ ਨਾਲ ਲਿਬ ਜੋੜ ਕੇ ਰਹਿੰਦੇ ਕੋਈ ਜੋ ਪਰਮੈਸ਼ਰ ਕਰ ਰਿਹਾ ਠੀਕ ਕਰ ਰਿਹਾ ਜੋ ਹੋ ਰਿਹਾ ਠੀਕੇ ਹੋ ਰਿਹਾ ਹਾਂਜੀ ਮਹੱਲਾ ਤੀਜਾ ए मन ऐसा सतगुरु खोज लो जित सेवियां जन्म मरण दुख जाए तैसा मूल ना होवै शब्द जलाए देखो गल उन्होंने अपने मन उ कहिए पर सारे सिखो देस्ते लागू मतलब कह अपने मन वाले दर्श कीती है ए मन ऐसा ਉਹ ਜਿਹੜਾ ਉਹਨਾਂ ਨੇ ਤਾਂ ਖੋਜ ਲਿਆ ਜਿਹਦੀਆਂ ਬਾਣੀਆਂ ਉਹ ਤਾਂ ਬਿਲ ਗਿਆ ਤਾਂ ਖੋਜ ਦਾ ਫਿਰਦਾ ਸੀ ਉਹ ਤੀਜੇ ਸਤਿਗੁਰੂ ਦੀ ਬਾਣੀ ਹੈ ਉਹ ਰਹਾਦਾਸ ਦੀ ਖੋਜ ਲਈ ਸੀਗਾ ਖੋਜ ਦਾ ਫਿਰ ਇਹ ਮਨ ਐਸਾ ਸਤਗੁਰੂ ਖੋਜ ਲਓ ਆਪਾਂ ਖੋਜ ਲਿਆ ਦੂਜਿਆਂ ਨੂੰ ਕਹਿ ਰਿਆ ਪੰਕਤੀ ਪਈ ਹੈ ਗੁਰਬਾਣੀ ਚ ਜਿੱਤ ਖੋਜ ਰਹੇ ਨੇ ਕਿਥਾਂ ਹੈਗੇ ਨੇ ਵੱਡੇ ਕੱਗੇ ਯੋਗਾਂ ਨੂੰ ਖੋਜ ਕੇ ਉਹਨਾਂ ਨੂੰ ਉੱਪਰ ਲਿਆ ਕੇ ਉਹਨਾਂ ਦੀ ਇੱਕ ਇਕੱਠੀ ਸੰਗਤ ਬਣਾ ਕੇ ਉਹ ਤੋਂ ਰਾਹਾ ਲੈ ਰਹੇ ਨੇ ਸਭ ਕੁਝ ਕਿਹਾ ਹੋਇਆ ਚੌਧਰੀਆਂ ਨੇ ਚੌਧਰ ਖਤਰ ਦੁਰੀਆਂ ਦੀ ਖਤਰ ਸੋ ਸਰਕਾਰੀਆਂ ਨੇ ਕਬਜ਼ਾ ਕਰ ਲਿਆ ਗੋਸਵਾਰਾਂ ਤੇ ਇਹਨਾਂ ਬਸਤੀਆਂ ਨੂੰ ਲਕੋਲ ਦੱਸੋ ਹੀ ਨਾ ਅਰੇ ਸਾਹਿਬ ਕੋਲ ਖੋਜ ਲਓ ਇਹ ਤਾਂ ਸੇਵਿਆ ਜਨਮ ਵਰਨਾ ਦੁਖ ਜਾਏ ਸੇਵਿਆ ਦਾ ਮਤਲਬ ਉਹਦੇ ਆਪ ਕਿਹਦੇ ਸੇਵਾ ਉਹਨੇ ਕੀ ਹੈ ਸੰਸਾਰ ਚ ਸੇਵਾ ਕੀ ਹੁੰਦੀ ਹੈ ਸੇਵਾ ਹੁੰਦੀ ਹੈ ਦੂਜੇ ਦਾ ਆਤਮਕ ਤੌਰ ਤੇ ਭਲਾ ਹੋਵੇ ਆਤਮਾ ਸਿੱਧਾ ਰਸਤਾ ਦਰਸ਼ਨ ਕਰੇ ਮਾਤਮ ਉਹਦੀ ਜੁਗ ਈਥੋਂ ਬਾਇੰਡ ਜੀ ਪੈਦਾ ਹੋਵੇ ਉਹ ਸੇਵਾ ਕੀ ਗਏ ਕਹਿੰਦੇ ਤੁਹਾਨੂੰ ਧੰਦੌਰ ਇਹ ਸੇਵਾ ਦੀਆਂ ਪੀਰ ਕਰਨ ਜੀ ਦਾ ਉਹ ਤੋਂ ਉਹ ਨੂੰ ਭਰ ਜਾ ਉਹਦੇ ਚਲ ਰੱਜਰ ਮਾੜਾ ਦੁੱਖ ਜਾਏ ਹਾਂਜੀ ਸੈਸਾ ਮੂਲ ਨਾ ਹੋਵੇ ਹੀ ਹੋਮੇ ਅੰਦਰ ਛੰਕਾ ਤੋਂ ਉਹਦੇ ਅੰਦਰ ਰਹੇ ਦੀ ਪੈਦਾ ਹੀ ਨਹੀਂ ਹੁੰਦੀ ਛੰਕ ਉਹਦੇ ਅੰਦਰ ਰਚਦਾ ਹੋਵੇ ਹੀ ਹੋਮੇ ਸ਼ਬਦ ਜਗਾਏ ਜਿਹੜੇ ਉਦੇਸ਼ ਨਾਲ ਹੰਕਾਰ ਨੂੰ ਕਾਟ, ਗੈਰ ਹੁਕਮ ਦਾ ਵਿਰੋਧ ਕਰਨ ਨੂੰ ਕਾਟ। ਇੱਕ ਨਾਮ ਹੈ ਇੱਕ ਹੋਵੇ, ਹੋਮੈ ਨਾਲ ਨਾਲ ਵਿਰੋਧ। ਜੋ ਜਿਹੜੀ ਸ਼ਕਤੀ ਸਾਡੇ ਅੰਦਰ, ਜਿਹੜੇ ਖਿਆਲ ਸਾਡੇ ਅੰਦਰ, ਹੁਕਮ ਦੇ ਪ੍ਰਤੀ ਸਾ ਲਈ ਦਿੰਦੇ, ਉਹਨੂੰ ਹੋਮੈ ਕਹਿੰਦੇ ਹੁ। ਠੀਕ ਹੈ। ਸ਼ਬਦ ਜਿਹੜਾ ਜੇ ਕੋ ਉਪਦੇਸ਼ ਹੈ ਜਾਲ ਦਿੰਦਾ ਹੋਵੇ ਨੂੰ ਸਾੜ ਦਦਾ ਕੂੜੇ ਕੀ ਪਾਲ ਵਿੱਚੋਂ ਨਿਕਲ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸਚ ਸੰਜਮ ਕਾਰ ਕਮਾਈ ਕੂੜੇ ਦੀ ਪਾਲ ਪਾਲ ਕਹਿੰਦੇ ਨੇ ਦੀਵਾਰ ਨੂੰ ਕਿਉਂ ਕੂੜੇ ਟੁੱਟੇ ਪਾਲ ਉਹ ਜੱਗੀ ਸਾਹਿਬ ਨੇ ਬਿੱਤੇ ਆਏ ਹੈ ਕੂੜ ਦੀ دیوار ਵਿੱਚੋਂ ਕਿਵੇਂ ਗਏ ਕਹਿੰਦੇ ਆ ਹੋਵੇ ਪਾਇਸਾ ਸਾਧਗੋ ਜੀ ਤੁਸੀਂ ਖੋਜ ਲਓ ਉਹ ਜਿਹੜਾ ਉਪਦੇਸ਼ ਕਰੂ ਉਹਦੇ ਨਾਲ ਕੂੜ ਦੀ دیوار ਟੈ ਜਾਣੀ ਹੈ ਕੂੜ ਦੀ ਕੰਧ ਗਰਜਾਣੀਆਂ ਵਿੱਚੋਂ ਟੂੜਦੀ ਪੂਰੇ ਪਾਲ ਵਿੱਚੋਂ ਨਿਕਲੇ ਵਿੱਚੋਂ ਨਿਕਲ ਜਾਂਦੀ ਹੈ ਕੂੜ ਜਿਹੜਾ ਝੂਠ ਦੀ دیوار ਹੈ ਵਿੱਚੋਂ ਟੈ ਜਾਂਦੀ ਹੈ ਇਹਨੇ ਬਾਹਰ ਪਾਸੇ ਹੋ ਜਾਂਦਾ ਵਾਦੀ ਕੂੜ ਦੀ ਦੀਵਾਰ ਹੈ ਉਹ ਮਰ ਜਾਂਦਾ ਹੈ ਉਹ ਆਪਣੀ ਹਰ ਧਰਵੀਂ ਦੀ ਹਰ ਧਰਵੀਂ ਛੱਡ ਦਿੰਦਾ ਸੱਚ ਵਸੈ ਮਨਿ ਆਇ ਸਾਕੇ ਮਤਬਾਚਦਾ ਸਾਕੇ ਕੱਲਾ ਰਹਿ ਜਾਂਦਾ ਬਲ ਜੂਠਾ ਜਿਹੜਾ ਇਹ ਬਸ ਬਰੇ ਜਾਂਦਾ ਤੇ ਚੁੱਪੇ ਹੋ ਜਾਂਦਾ ਚੁੱਪੇ ਹੋ ਜਾਂਦਾ ਹੈ ਬਸ ਚਲਦਾ ਆਪਣੀ ਰਾਗਤਾਂ ਸਾਰੀ ਛੱਡ ਦਿੰਦਾ ਪਤਾ ਬਣੀਆਂ ਜਿੱਦੀਆਂ ਵੀ ਮੇਰੇ ਜੱਗ ਨਾਲ ਜਿੱਦੀਆਂ ਵੀ ਮੇਰੇ ਜੱਗ ਤਰਾਈਆਂ ਨੇ ਜਿੱਦੀਆਂ ਵੀ ਮੇਰੇ ਨਾਲੇ ਇਹ ਜੋ ਜੀਵਨ ਜਿਉਣਾ ਲੱਗ ਜਾਂਦਾ ਅੰਤਨ ਸਾਲ ਤੋਂ ਹਾਂਜੀ ਹੋ ਜਾਂਦੀ ਹੈ ਪਰਜਤੋ ਹੋ ਜਾਂਦਾ ਥੋਏ ਫਾਟ ਸੱਚ ਜੇ ਮ ਕਾਰ ਕਰਦਾ ਹੈ ਤੇ ਉਹ ਸੱਚ ਔਰ ਸੁਰਜ ਉਹ ਜਿੰਨੇ ਹੋੜੇ ਰਾਣੇ ਜਿਆਦਾ ਕਰਦੇ ਨੇ ਉਹ ਆਪਣੀਆਂ ਲੋੜਾਂ ਦੀ ਵਧਾਉਂਦਾ ਜਿਹੜਾ ਲੋੜਾਂ ਨੂੰ ਘਟਾਉਂਦਾ ਵਧਾਉਂਦਾ ਨਹੀਂ ਉਹ ਸਜੀਵੀ ਚ ਸਿੱਧਾ ਕਹਿਣਾ ਲੋੜਾਂ ਨੂੰ ਕੰਟਰੋਲ ਚ ਰੱਖੋ ਆਪਣਾ ਜਿੰਨਾ ਉਹਨ ਕੋਲ ਹੈ ਜਿਵੇਂ ਭਗਤਾਂ ਕੋਲ ਦੇਖੋ ਗਰੀਬੀ ਸੀ ਉਹਦੇ ਵਿੱਚ ਹੀ ਖੁਸ਼ੀ ਸੀ ਉਹ ਸੱਚੀ ਵੀ ਸੀ بس ਖਰਚੇ ਘਟਾ ਲੈਣਾ ਸਜਮ ਕਾਰਕਮ ਠੀਕ ਹੈ ਜੀ ਕਾਰਕਾ ਜਰੂਰ ਧਾਰੀ ਕਾਰ ਕਰਦੇ ਨੇ ਪਰ ਉਹ ਮਾਇਆ ਦੀ ਦੌੜ ਚ ਦੀਪੈ ਵੀ ਮੇਰੇ ਕੋਲ ਵੀ ਕਾਰ ਚਾਹੀਦਾ ਹੈ ਆ ਚਾਹੀਦਾ ਬੰਗਲਾ ਚਾਹੀਦਾ ਉਹ ਚਾਹੀਦਾ ਤੇ ਕਾਜਵ ਨਹੀਂ ਹੈ ਇਹ ਇਹ ਪਰੇਸ਼ਾਨੀ ਪੈਗਾ ਤੁਹਾਨੂੰ ਠੀਕ ਹੈ ਨਾਮ ਕਬੀਰ ਜੀ ਕਹਿੰਦੇ ਸਾਧ ਕੀ ਸੰਗਣਾ ਛੋੜੀਏ ਕਰਮ ਸਤਗੁਰ ਮਿਲਾ ਹਰ ਜੀਉ ਕਿਰਪਾ ਕਰੇ ਰਜਾਈ ਨਾਨਕ ਪੂਰੇ ਕਰਮ ਸਤਗੁਰ ਮਿਲਾ ਜੇ ਮਿਲ ਜਾਈਦਾ ਕਿਸੇ ਉਹ ਬਹੁਤਿਆਰ ਮਿਲਿਆ ਜੀ ਚੋੜ ਦੇ ਪਾਸ ਪਰ ਆਏ ਹੋ ਕੇ ਜਿਨ੍ਹਾਂ ਕੋਲ ਨਾਨਕ ਨੂੰ ਮਿਲ ਗਿਆ ਜਿਨ੍ਹਾਂ ਕੋਲ ਨਾਨਕ ਨੇ ਨਾਲ ਸਮਝ ਲਈ ਨਾ ਫਲਕ ਗੈਸ ਨੂੰ ਮੁੱਕ ਪੈਦੀ ਹੈ ਐ ਤੇ ਗੈਸ ਉਹਦਾ ਸਪਾਰਟ ਦੀ ਲੋੜ ਸੀ ਜਿਹੜਾ ਕੋ ਸਮਝ ਨਹੀਂ ਤਬੂ ਉਹ ਨਹੀਂ ਬਣਦਾ ਨਾਨਕ ਨੂੰ ਗੋਲ ਨਾਨਕ ਵਾਲੇ ਕੋਈ ਉਹਨੂੰ ਗਿਆਨ ਹੋਇਆ ਕਿ ਮਿਲ ਤੱਕਣਾ ਕੀ ਕਹੇ ਨਾਨਕ ਪੂਰੇ ਕਰਮ ਸਤਿਗੁਰੂ ਮਿਲੇ ਹਰ ਜੀਓ ਕਿਰਪਾ ਕਰੇ ਰਜ਼ਾਈ ਪੂਰੇ ਕਰਮ ਹੋਵੇ ਆਪਣੇ ਗੱਲ ਅਸਕੇ ਹੱਦ ਬੀਤੀ ਕਹਿ ਰਹਿਣਾ ਹਾਂਜੀ ਆਹ ਵਿੱਚ ਹੋਇਆ ਪੂਰਾ ਦਾ ਆਪਣਾ ਪੂਰੇ ਕਰਮ ਹੋਵੇ ਪੂਰਾ ਹੀ ਕਰਮ ਹੋਵੇ ਕਿਰਪਾ ਹੋਵੇ ਐਸਾ ਸਤਗੁਰੂ ਤਾਲ ਮਿਲਦਾ ਹੈ ਇਹ ਤਾਂ ਭਾਗੇ ਸੀ ਤਾਂ ਹਾਂਜੀ ਕਿ ਉਹ ਨਾਲ ਚੱਲ ਪੈਗੀ ਕੋਈ ਗੱਲ ਨਹੀਂ ਖਾਇਲ ਕਰਦੇ ਕਹਿੰਦੇ ਜਦੇ ਆ ਗਏ ਛਡੂਰ ਸਾਹਿਬ ਪੂਰੇ ਕਰਮ ਸਦਗੁਰੂ ਦਾ ਕਿਰਪਾ ਕਰੇ ਹਰ ਜੀ ਉਹ ਕਿਰਪਾ ਕਰੇ ਰਜਾਈ ਹਰ ਉਹ ਕਿਰਪਾ ਵੀ ਕਰੇ ਅਰ ਉਹਦੀ ਵੀ ਹੋਵੇ ਉਹਦੀ ਰਜਾ ਚ ਵੀ ਚੱਲੇ ਰਜਾ ਜੀ ਜੱਲੇ ਤੇਈ ਕਿਰਪਾ ਹੋਣੀਏ ਨਾਲੇ ਸਰਤ ਲਾਤੀ ਜਿਹੜਾ ਰੋਕ ਬਰਜਾਈ ਚੱਲਣਾ ਜਿਹੜਾ ਹੈਗਾ ਇਹਦੇ ਬਿਨਾ ਕਿਰਪਾ ਦੀ ਲੋੜੀ ਪਾਣੇ ਜ ਪਹਿਲਾਂ ਪੈਣਾ ਕਿਰਪਾ ਬਾਸ ਲੋੜੀ ਹੋਵੇ ਹੋਜੀ ਪੌੜੀ ਜਿਸ ਕੈ ਹਰ ਹੋਵੇ ਤਿਸ ਕੀ ਮੁਠੀ ਵਿੱਚ ਕਿਸ ਕੋ ਤਲਕੀ ਕਿਸੇ ਦੀ ਨਹੀਂ ਹਰ دیਵਾਨ ਸਭ ਆਣ ਪੈਰੀ ਪਾਇਆ ਦੱਸੋ ਇਹ ਧਮਕੀ ਦੇ ਅਸਰ ਜੇ ਕਰੀਏ ਇਹਦਾ ਬਹੁਤ ਉਲਟ ਫੋਲਸਟ ਹੋ ਜਾਊਗਾ ਸਾਰਾ ਜਗ ਤੋਂ ਵੀ ਮੁੱਠੀ ਚ ਆ ਕਿਸੇ ਆਦਮੀ ਦੇ ਚ ਆ ਬਾਪੇ ਹੋ ਗਿਆ ਐਸ ਤ੍ਰਿਕ ਕਰਨ ਦੇ ਅਖਰੀ ਹੱਥ ਦੀ ਕਸਰ ਲਵੇ ਅਖਰੀ ਅਰਥ ਤੇ ਹੁਣ ਅਬ ਵੀ ਜੇ ਅਖਰੀ ਅਰਥ ਕਰੀਏ ਕਿਦੋਂ ਨੂੰ ਹੋ ਕੇ ਗੱਲ ਹਾਂਜੀ ਅਸਲੇ ਵਿੱਚ ਗੱਲ ਕੀ ਹੈ ਕਿ ਸਿੱਕੇ ਘਰ ਦੀਵਾਲਾ ਹਰ ਹੋਵੇ ਜਿਹਦੇ ਅੰਦਰ ਫਿਰਦੇ ਵਿੱਚ ਸ਼ਬਦ ਗੁਰੂ ਕਹਿੰਦਾ ਤੁਰਤੀ ਬਾਣੀ ਆਈ ਜਿਹਦੇ ਅੰਦਰ ਤੁਰਤੀ ਬਾਣੀ ਆਜਵੇ ਇਸ ਕੀ ਮੁੱਠੀ ਵਿੱਚ ਜਗਤ ਸਭ ਆਇਆ કેમે આયા હો કબ ઠીક જે તું મેરા હોઈ રહેના તો સબ જગ તેરા હોએ બસ એની એહી વ્યાખ્યા અચ્છા ઓર અસિયાની વ્યાખ્યા કરી શકડે એક પંક્તિ જેની વ્યાખ્યા જે તું મેરા હોઈ રહેના સબ જગ ત તબ જગ તેરા હોઈ બસ એની વ્યાખ્યા એ પંક્તિની ઠીક ਇਸ ਤਲਕੀ ਕਿਸੇ ਦੀ ਨਹੀਂ ਹਰ ਦੀ ਸਭ ਆਣ ਪੈਰੀ ਪਾਇਆ ਕਿਸਕੀ ਤਲਕੀ ਉਹਦੀ ਕਿਸੇ ਨਾਲ ਕੋਈ ਰੱਜੇ ਛਦੀ ਕਿਸੇ ਨਾਲ ਉਹਦਾ ਵੈਰ ਨਹੀਂ ਵਿਰੋਧ ਨਹੀਂ ਹੈ ਵੈਰ ਵਿਰੋਧ ਚ ਤਾਂ ਅੱਗੇ ਬਥੇਰੇ ਜਲੂ ਇਹ ਲੋਕਾਂ ਨੂੰ ਤੇ ਕਹਿ ਵੈਰ ਵਿਰੋਧ ਦਾ ਗੁਰਬਖਸ਼ ਨੂੰ ਸਾਡੀ ਸਾਡੀ ਬੇਇੱਜ਼ਤੀ ਕਰਦੇ ਨੇ ਸਾਡੇ ਨਾਲ ਸਾਡੀ ਬਾਇ ਕਰਦੇ ਉਹਨਾਂ ਨੂੰ ਕਿਹਾ ਹੁੰਦਾ ਦੇਈਦਾ ਉਹ ਕਹਿਣਾ ਹੈ ਭੈਰ ਵਿਰੋਧ ਕਾਮ ਕ੍ਰੋਧ ਲੋਭ ਗੋਹ ਝੂਠ ਬਕਾਰ ਬਰ ਲੋਭ ਕਰੋ ਇਹ ਕਈ ਜਨਮ ਸਾਤੀ ਜਨਮ ਇਦਾ ਇਹ ਸਭ ਕੁਝ ਛੜਿਆ ਨਹੀਂ ਮੈਂ ਸਾਹੀ ਜਨਮ ਲੈਦਾ ਰਿਆ ਹੁਣ ਤੱਕ ਕਿਹਦੇ ਨਾਲ ਹੋਣੀ ਉਹਨੂੰ ਕਿਸੇ ਕੋਈ ਉਹਨੂੰ ਬੋਲਦਾ ਫੋਲਦਾ ਮਿੱਠਾ ਬੋਲ ਉਹਦੇ ਵੀ ਉਹ ਗੱਲ ਦੀ ਤਲਕੀ ਕਰਦਾ ਹੀ ਨਹੀਂ ਗੁੱਸਾ ਹੀ ਪਰ ਇਹ ਗੋਥਾਨੀ ਜੇ ਉਹ ਫੋਲ ਫੋਲ ਬੋਲ ਦੇ ਉਹ ਕਰੇ ਉਹ ਉਹ online ਜੋ ਕਰ ਦਿੰਦਾ ਚਲੋ ਕਿ ਇਹ ਇਹ ਇਹ ਸਟੇਜ 'ਤੇ ਖੜਾ ਇਹਦੇ ਉੱਪਰ ਬਹਿਰ ਵਿਰੋਧ ਹੈ ਕੱਲ ਕਹਿਣਿਆ ਇਹਨੂੰ ਹੱਕ ਵੀ ਹੈ ਕਹਿਣ ਦਾ ਕੋਈ ਆਪ ਕਹੇ ਉਹ ਇਹ ਤਲਕੀ ਕਰਦੇ ਇਸ ਗੱਲ ਦੀ ਕੱਲ ਕੀ ਤਾਂ ਪਰਮੁਖ ਕਰਦੇ ਹਨ ਹਰ ਤਿਸ ਕੋ ਤਲਕੀ ਕਿਸੇ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ ਹਰਦੀਵਾਨ ਜਬਾ ਜਿਹੜਾ ਹਰਦੀਵਾਨ ਹੈ ਸਭ ਆਣ ਪੈਰੀ ਪਾਇਆ ਹਰਦੀਵਾਨ ਕੌਮ ਹੈ ਹਰਕੇ ਲੋਗ ਜਿਹੜੇ ਗੁਰੂਖੰਦੇ ਨੇ ਨਾ ਗੁਰਸਿੱਖ ਨੇ ਇਹ ਹਰਦੀਵਾਨ ਹੁੰਦਾ ਹੈ ਦਿਵਾਲ ਚੋਰੀ ਬੈਠੂ ਨਾ ਜਿਹੜਾ ਰਾਜੇ ਨੂੰ ਮੰਨਦਾ ਰਾਜਾ ਠੀਕ ਹੈ ਜਿਹੜਾ ਰਾਜੇ ਨੂੰ ਰਾਜਾ ਹੀ ਦਾ ਉਹ ਦਿਵਾਨ ਉਹਦਾ ਵਾਕੀ ਹੈ ਜਿਹੜੇ ਗੁਰਬਾਣੀ ਤੋਂ ਆਕੀ ਸੀਰਾ ਹੋਤਾ ਨਹੀਂ ਸੀ ਗੁਰੂ ਘਰ ਚੋਂ ਦੇ ਜਿਹੜੇ ਬਸ ਸਿੱਖੀ ਸਕੂਲ ਲੈ ਕੇ ਸਿੱਖ ਦੂਏ ਤੋਂ ਵੀ ਸੋਣ ਨਹੀਂ ਸੀ ਉਹ ਵੀ ਆਣ ਪੈਰੀ ਪਾਇਆ ਉਹ ਵੀ ਆਣ ਕੇ ਸਾਝੀ ਪਾਦੇ ਸੀ ਉਹ ਸਿੱਖਦੇ ਸੀ ਆਉਣ ਲੱਗ ਜਾਂਦੇ ਸੀ ਸੰਗਤ ਬਣ ਜਾਂਦੇ ਸੀ ਹਰ ਦੀਵਾਨ ਉਹਨੂੰ ਕਹਿੰਦੇ ਨੇ ਜਿਹੜੇ ਹਰ ਕੇ ਹੋਣ ਹਰ ਇੱਕ ਲੋਗ ਬਚਾ ਜਿਹੜਾ ਆਪਾਂ ਦੀਵਾਨੀ ਦੀ ਗੱਲ ਕੀਤੀ ਇੱਕ ਸ਼੍ਰੀ ਰਾਗ ਕੀ ਵਾਰ ਵਿੱਚ ਵੀ ਆਪਾਂ ਨੂੰ ਸ਼ਲੋਕ ਆਯਾ ਸੀ ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀਵਾਨੂ ਮਿਲਿਆ ਇਹ ਵੀ ਉਹੀ ਗੱਲ ਹੋ ਰਹੀ ਹੈ ਉਹੀ ਗੱਲ ਸੰਬੰਧ ਸੰਬੰਧ ਦਾ ਗੁਰੂ ਜੀ ਹਰਦੇ ਵਾਣੇ ਆ ਹਾਂਜੀ ਤੇ ਜਿੱਥੇ ਉਹ ਜਾਏ ਥਿੱਥੇ ਉਹ ਸੁਰਖਰੂ ਉਸਦੇ ਮੂੰਹ ਡਿੱਠੇ ਸਭ ਪਾਪੀ ਤਰੇ ਇਸ ਗੱਲ ਦਾ ਇਸ਼ਾਰਾ ਉੱਥੇ ਵੀ ਕਰਕੇ ਆਏ ਆਂ ਤੀਸਰੇ ਪਾਤਸ਼ਾਹ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਣੀ ਆਪਣਾ ਪੜਾਵਾਂ ਦੁਆਰਾ ਅਰਥਾਈ ਜਾਂਦੀ ਹੈ ਹਾਂਜੀ ਕਿਵੇਂ ਆਈ ਹੋਈ ਕੀਤਾ ਗਲਤ ਅਰਥ ਨਾ ਲਵੇ ਹਾਂਜੀ ਮਾਨਸਾ ਕਿਉ ਦੀਵਾਨੋ ਕੋਈ ਨਸਤ ਭਜ ਨਿਕਲੈ ਹਰ ਦੀਵਾਨੋ ਕੋਈ ਕਿੱਥੇ ਜਾਇਆ ਉਹ ਜਿਹੜੇ ਆਇਆ ਰਾਜਿਆਂ ਦੇ ਦਵਾਲ ਨੇ ਇਹ ਤਾਂ ਠੱਕ-ਪੱਕ ਕੋਈ ਆਕੀ ਹੋ ਜਾਂਦਾ ਜੇ ਨਿਕਲ ਗਿਆ ਸੀ ਉਹ ਸ਼ਿਵਾਜੀ ਵੀ ਨਿਕਲ ਗਿਆ ਸੀ ਤੋਂ ਉਹਦੇ ਕਬਜ਼ੇ ਚ ਹਾਂਜੀ ਉਹ ਕੋਈ ਰਾਜੇ ਨੇ ਸੰਸਾਰੀ ਖਾਲ ਦੇ ਕਬਜ਼ੇ ਚੋਂ ਕਿੱਥੇ ਜਾਊ ਕੋਈ ਨਸ ਭੱਜ ਕੇ ਠੀਕ ਹੈ ਜੀ ਅਸਦਵਾਨ ਜਿਹੜੇ ਨਹੀਂ ਆਉਂਦੇ ਆਕੀ ਦੇ ਭੱਜ ਕੇ ਜਾਣਗੇ ਕਿੱਥੇ ਉਹ ਹਾਂਜੀ ਪਈ ਪਾਈ ਰਾਜਾਂ ਦੇ ਦਬਦੇ ਰੇ ਆਖੀ ਉਧਰ ਤਾਂ ਦੌੜ ਕੇ ਦੂਸਰੇ ਜਾਊਗਾ ਕਿੱਥੇ ਭੱਜ ਕੇ ਇੰਨਾ ਰਾਜ ਹੈ ਠੀਕ ਹੈ ਜੀ ਕੋਈ ਕਿੱਥੇ ਜਾਏ ਜਾਊਗਾ ਆਖੀਰ ਕਿੱਥੇ ਜਿਹੜਾ ਹਰ ਕੇ ਨੀ ਆਉਂਦਾ ਕੋਈ ਢੋਈ ਲਊਗਾ ਉਹ ਨੂੰ ਠੀਕ ਹੈ ਜੀ ਕਿੱਥੇ ਢੋਈ ਦੀ ਤਿੰਨ ਲੋਕਾਂ ਨੂੰ ਇਹ ਵੀ ਹਕਤ ਹੈ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੈ ਤਿਨੀ ਰਹਿੰਦੇ ਖੁੰਦੇ ਆਣ ਸਭ ਕਰਕੇ ਐਸਾ ਦੀਵਾਨ ਤਾਂ ਭਗਤਾਂ ਦੇ ਹਿਰਦੇ 'ਚ ਬਸਦਾ ਹੁੰਦਾ ਹੈ। ਭਗਤਾਂ ਦੇ ਹਿਰਦੇ 'ਚ ਤੀਅ ਸਤ ਸੰਗਤ ਜਿਗਰ ਕਹਿੰਦਾ ਨਾ ਮੈਂ ਲੋਕਾਂ ਨੂੰ ਕਹਿੰਦਾ ਸਤ ਸੰਗਤ ਅੱਗੇ ਉਹ ਸਤ ਸੰਗਤ ਦਾ ਅੰਦਲਾ ਬਾਣਾ ਅਦਲ ਅੰਤਰਾਦਵ ਕੇ ਉਹਦੇ ਨਾਲ ਜੁੜ ਜਾਂਦਾ ਹੈ ਅਫਰਕਾ ਦੀਵਾਰ ਬਣ ਗਿਆ ਉਹ ਕਹੀ ਹੋ ਗਏ ਸਭਲੇ ਅੰਦਰੇ ਬਣ ਗਏ ਹਰ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਤੇ ਜਿਹੜੇ ਰਹਦੇ ਖੁੰਦੇ ਹੁੰਦੇ ਨੇ ਅੱਗੇ ਉਹ ਆ ਕੇ ਖੁੱਲਦਾ ਇਹ ਜਿਹੜਾ ਦਸੂਰ ਦੁਆਰ ਹੈ ਇਹੀ ਤਾਂ ਹਰਕਾ ਦਿਵਾਨ ਹੈ ਹੋਰ ਹਰਕਾ ਦਿਵਾਨ ਜਿਹੜਾ ਉੱਧਰੇ ਹੈ ਸਭ ਤੇ ਜਿਹੜਾ ਖੁੱਲ ਗਿਆ ਬੱਜਰ ਖਪਾੜ ਖੁੱਲ ਗਈ ਜੀ ਤੇ ਫਸਟ ਹਰਕਾ ਦਿਵਾਨ ਉਹ ਅੰਦਰੇ ਸਵਤਾਂ ਦੀ ਸਿੱਖਤ ਨਾਲ ਖੁੱਲ ਜਾਂਦਾ ਹੈ ਖੁੱਲਵਾਇਆ ਕੋਈ ਖੁੱਲਵਾਇਆ ਨਾਲ ਖੁੱਲਦਾ ਹੈ ਕੋਈ ਉਹਨਾਂ ਦਾ ਖੁੱਲ ਜਾਂਦਾ ਜਿਹੜੇ ਗੁਰਸਿੱਖ ਹੋਦੇ ਨੇ ਇਹ ਕਹਿੰਦਾ ਭਾਵੇਂ ਭਗਤਾਂ ਦਾ ਹੀ ਭਗਤਾਂ ਦੀ ਉਹ ਟੇਕ ਲੈਣੀ ਪਏਗੀ ਹਾਂ ਭਗਤਾਂ ਕੋਈ ਉਪਦੇਸ਼ ਹੈ ਗੁਰਸਿੱਖ ਭਗਤ ਹੈ ਹਾਂਜੀ ਇਹ ਇਹ ਕੁਰਬਾਨੀ ਹੈ ਜਿਹੜੀ ਇਹ ਉਪਦੇਸ਼ ਗੁਰਸਿੱਖ ਨੇ ਵੀ ਉਪਦੇਸ਼ ਲਿਖਿਆ ਹੋਇਆ ਹੈ ਸਾਡੀ ਪੋਥੀ ਨੂੰ ਪਰਮੇਸ਼ਰ ਕਾ ਧੰਕ ਹੈ ਠੀਕ ਹੈ ਉਹ ਪਰਮੇਸ਼ਰ ਨੇ ਤਾਂ ਬੋਲਿਆ ਸੀ ਭਗਤਾਂ ਨੇ ਸੁਣਿਆ ਸੀ ਭਗਤਾਂ ਦੇ ਜੋ ਬੋਲਿਆ ਸੁਣਿਆ ਸੀ ਉਹ ਲਿਖ ਦਿੱਤਾ ਇਹ ਉਹ ਦੀ ਬਰਾਬਰੀ ਉਹ ਦੇ ਤੱਥ ਗੁਆ ਜਗ੍ਹਾ ਸਾਨੂੰ ਅੱਖਰ ਬੁਲਾਉਂਦੇ ਨੇ ਉਹਨੂੰ ਬੁਲਾਉਂਦਾ ਸੀ ਜੇ ਮੈਂ ਕਰੋਨਾ ਜਗ੍ਹਾ ਲੈ ਲਈ ਅੱਖਰਾਂ ਦੇ ਪਰਮੇਸ਼ਰ ਦੀ ਜਗ੍ਹਾ ਲਈ ਹੋਈ ਹੈ ਉਹਦੀ ਜਗ੍ਹਾ ਇਹ ਅੱਖਰ ਇਹਨਾਂ ਅੱਖਰਾਂ ਵਿੱਚ ਇਹਨਾਂ ਅੱਖਰਾਂ ਵਿੱਚ ਕੋਈ ਗੁਰਮੁਖ ਖੋਜੇ ਇਹਨਾਂ ਜੋ ਖੋਜ ਲੋ ਸਭ ਕੁਝ ਕਰ ਲੈ ਇਹਦੇ ਵਿੱਚੋਂ ਮਿਲ ਜਾ ਤੁਹਾਨੂੰ ਬਿੜੀ ਜਿਹੜੀ ਖੁਲਬਾਉਂਦੀ ਨਾ ਬਿੜੀ ਉਹ ਬਿੜੀ ਇਹ ਚ ਦਰਜ ਹੈ ਕਿਵੇਂ ਖਲਦਾ ਹੁੰਦਾ ਕਾਸ ਬਦਵਾਰ ਤੇ ਕੁਟੀ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖੀ ਵਿਰਲੇ ਕਿੰਨੇ ਇੱਤੇ ਆਇਆ ਹਰ ਦੀ ਵਡਿਆਈ ਕਰਮ ਪ੍ਰਾਪਤ ਹੋਵੇ ਜਿਹੜੀ ਹਰ ਦੀ ਵਡਿਆਈ ਹੈ ਗੁਰਬਾਣੀ ਆ ਨਾਮ ਦੀ ਵਡਿਆਈ ਹੈ ਜੀਨਾ ਨੇ ਦਾ ਭਾਈ ਇਹ ਬੋਲਦੀ ਹੈ ਕਿ ਆ ਜੀਨਾ ਨੇ ਪੜੀ ਹੈ ਸੁਣੀ ਹੈ ਨੂੰ ਇਹਦੀ ਸੰਗਤ ਮਿਲੀ ਹੈ ਇਹ ਵੀ ਕਰਵਾ ਗੁਰਸਿੱਖਾਂ ਦੇ ਘਰ ਜਾਣ ਬਹੁਣਾ ਇਹ ਵੀ ਇੱਕ ਕਿਰਪਾ ਗੁਰਸੇ ਸਿੱਖਤੇ ਜਾਣੂ ਕੋ ਕੇ ਗੁਰਬਾਣੀ ਨਾਲ ਜੋੜਨਾ ਇਹ ਇੱਕ ਹੋਰ ਉਦੋਂ ਵੱਡੀ ਕਿਰਪਾ ਗੁਰਬਾਣੀ ਨਾਲ ਜੁੜ ਕੇ ਸੁਣ ਕੇ ਸਮਝ ਕੇ ਉਸ ਤੋਂ ਲੈਣਾ ਇਹ ਹੋਰ ਵੱਡੀ ਕਿਰਪਾ ਔਰ ਬੱਦੀ ਦੀ ਇਹ ਪੂਰ ਤਿੰਨ ਸਤੈਪਾਂ ਤੇ ਆ ਕੇ ਕਿਰਪਾ ਪੂਰਨ ਹੋ ਗਈ ਹੈ ਤੇ ਪੂਰੀ ਕਿਰਪਾ ਤੇ ਆ ਪੂਰੀ ਕਿਰਪਾ ਹੋਏ ਗੁਰ ਦੇਖਾਂ ਦੇ ਘਰ ਜਾਣ ਬਲੇਣਾ ਅਧੂਰੀ ਕਿਰਪਾ ਗੁਰਬਾਣੀ ਸੁਣ ਲੈਣ ਲੋ ਜੋ ਹਨੜਾਲ ਵੀ ਪੂਰੀ ਕਿਰਪਾ ਪਾਠ ਜਵਾਨੀ ਆਦਾ ਸਾਰੇ ਸੁਗਉਣੇ ਸਾਹਿਬ ਦੇ ਪਾਠ ਕਰ ਕਰ ਕਰਦਾ ਪਰ 100 ਵੀ ਗੱਦੀ ਬੰਦ ਬੰਦਿਆ ਕਿਰਪਾ ਅਧੂਰੀ ਹੈ ਜਦ ਮਾਨ ਮੰਨਿਆ ਕਹਿ ਕਬੀਰ ਬੰਨ ਮੰਨਿਆ ਬੁਰ ਬੰਦਿਆ ਕਹਾਰ ਜਾਂਦੇ ਪੂਰਨ ਕਿਰਪਾ ਹੋ ਇਹ ਪੂਰੀ ਕਰਤਾ ਇਹਨੂੰ ਸਿਖਾ ਲੈ ਕਰ ਗਿਆ ਨਾ ਉਹ ਵੀ ਪੂਰੀ ਕਿਰਪਾ ਹੈ ਜਿਹੜਾ ਗੁਰਮੁਖੀ ਵਿਰਲਾ ਕਿਨੇ ਤੇ ਆਇਆ ਹਾਂ ਪ੍ਰਾਪਤੀ ਕਿਨ ਜਿਹੜੇ ਪ੍ਰਾਪਤੀ ਹੋ ਗਈ ਉਹ ਤੇ ਪੂਰਨ ਕਰ ਠੀਕ ਹੈ ਪ੍ਰਾਪਤੀ ਵਾਲੇ ਨੂੰ ਪ੍ਰੋਸੈਨਾ ਬੋਰ ਪ੍ਰਾਪਤੀ ਦੀ ਕੁੱਤੇ ਇਹੀ ਆਪਾਂ ਪੜ੍ਹਦੇ ਹਾਂ ਉਹੀ ਪ੍ਰਸੰਗ ਚੱਲਦਾ ਇੱਕ ਸਾਖੀ ਚੱਲ ਰਹੀ ਹੈ ਇਹ ਇੱਕ ਬਿਧੀ ਚੱਲ ਰਹੀ ਹੈ ਕਿਵੇਂ ਬੋਲ ਕਿਰਪਾ ਹੋ ਕਿਵੇਂ ਬਦਲਾਵੂ ਕਿਵੇਂ ਮੁਕਤੀ ਤੁਹਾਡਾ ਸਾਰਾ ਬੁੱਠੀ ਜੋਜੂਗਾ ਇਹ ਸਾਰੀ ਬਿਜਲੀ ਇਹਦੇ ਦਰਜ ਕੀਤੀ ਹੋਈ ਸਾਖੀ ਦੇ ਤੌਰ ਤੇ ਕਹਾਣੀ ਦੇ ਤੌਰ ਤੇ ਹਾਂ ਠੀਕ ਹੈ ਜੀ ਇੱਥੇ 14ਵੀਂ ਪੌੜੀ ਸਮਾਪਤੀ ਹੈ ਜੀ ਅਰਜੀ